ਮਨ ਨੂੰ ਭੁੱਲੇ ਜੰਮ ਕੀ ਕਾਰ ਮਨ ਮੁਖ ਰਿਹੇ ਜਿਹੜੇ ਝੂਠ ਧਰਮ ਵਾਲੇ ਨੂੰ ਮਨ ਮੁਖ ਹੁੰਦੇ ਉਹ ਭੁੱਲੇ ਹਰ ਰੋ ਡਰਾ ਪੈ ਜਾਂਦੇ ਜੰਮ ਕੀ ਕਾਰ ਇਸੇ ਕਰਕੇ ਉਹਨਾਂ ਨੂੰ ਜੰਮ ਜਿਹੜਾ ਹੈ ਨਾ ਹਰ ਵਕਤ ਪੈ ਰਹੀ ਰਹਦੀ ਹੈ ਜੰਮ ਡੰਡਾ ਉਹਨਾਂ ਦੇ ਸਿਰ ਰਹਿੰਦਾ ਗੁਰਮੁਖਾਂ ਨੂੰ ਜੰਮ ਦਾ ਕੋਈ ਪੈ ਨਹੀਂਦਾ ਉਹਨਾਂ ਨੂੰ ਬਹੁਤਾ ਪੈ ਹਰ ਉਸ ਤੋਂ ਹੋ ਰਿਹਾ ਹੈ ਪਰ ਹੈ ਹਾਣੇ ਹਾਂ ਪਰਤਾ ਜੁਲ ਪਰ ਘਰ ਦੀ ਦ੍ਰਿਸ਼ੀ ਰਹਦੀ ਉਹਨਾਂ ਦੀ ਪਰ ਘਰ ਕੇ ਫਿਰ ਕੁੜੀ ਪੜਕਰ ਘਰ ਦਾ ਉਹ ਆ ਜਿਹੜੀ ਆ ਨਾ ਦਿਮਾਗ ਟਰਕੁਟੀ ਨੇ ਦਸ ਦੁਆਰ ਇੱਥੇ ਜਗਾ ਰਹੀ ਦੀ ਹੈ ਸ਼ੈਤਾਨ ਤੇ ਲਾਇਆ ਦੇਵ ਦੀ ਸ਼ੈਤਾਨ ਦ੍ਰਿਸ਼ੀਆਂ ਨੇ ਕਹਤੇ ਮਾਤੇ ਦ੍ਰਿਸ਼ਟੀ ਦੇਸ਼ਤ ਕਰੋਰ ਮਾਤੇ ਤ੍ਰਿਪੁਟੀ ਦਿਸਤ ਕਰੂਰ ਬੱਤੇ ਜਿਹੜੀ ਤ੍ਰਿਪੁਟੀ ਹੈ ਇੱਥੇ ਜਿਹੜੀ ਦਿਸੇਦੀ ਕਰੂਰ ਦ੍ਰਿਸ਼ਟੀ ਹੈ ਜ਼ਾਲਬ ਦ੍ਰਿਸ਼ਟੀ ਹੈ ਦੰਡੇ ਦ੍ਰਿਸ਼ਟੀ ਹੈ ਮਾਤੇ ਤ੍ਰਿਪੁਟੀ ਦਿਸਤ ਕਰੂਰ ਕੋੜਾ ਬੋਲੇ ਜੀਭਾ ਕੀ ਬੋਲ ਇੱਥੇ ਤਾਂ ਮਿੱਠਾ ਬੋਲ ਰਹੀ ਈ ਤੇ ਕੋੜਾ ਬੋਲਾ ਬੋਲ ਸੋੜੇ ਮਾਇਆ ਧਾਰੀ ਜੀ ਬਾੜੀ ਜੇ ਇਹ ਤੇ ਨਾਮ ਤੇ ਗੱਲ ਹੀ ਨਹੀਂ ਹੋ ਸਕਦੀ ਜੇ ਬਾਗੀ ਬੋਲ ਚਬਰ ਜਬਰ ਬੋਲਦੇ ਐ ਵੀ ਬੋਲਦੇ ਨੇ ਤੋ ਘਰ ਦੇ ਪਾਸੇ ਹੋ ਗਏ ਇਧਰੋਂ ਕਰਕੇ ਦੂਰ ਪਾਸੇ ਹੋ ਗਏ ਇੱਕ ਤੋਂ ਦੂਰ ਪਾਸੇ ਹੋ ਗਏ ਥੂੜ ਪੁਨਾ ਖਤਰੇ ਪਾਉਂਦੀ ਹੋਵੇ ਮਨਮੁਖੀ ਭਰਮ ਭਵੈ ਬੇਬਾਨ ਬਰਮ ਭਰਮ ਭਵੈ ਮੁੱਖ ਹੈ ਜਿਹੜੇ ਪਰਮਦੇਵ ਚ ਉਹਦੇ ਨਾਲ ਦੇ ਪਰਮ ਚ ਘਰੇ ਹੋਏ ਨੇ ਦੇ ਦੇ ਪਰਮ ਤੋਂ ਬਾਅਦ ਹੀ ਆਉਂਦੇ ਨੇ ਬੇਬਾਣੀ ਕਿਉਂਕਿ ਆ ਜਿਹੜੀ ਬਾਣੀ ਹੈ ਨਾ ਅੰਤਰਾਦੋ ਦੀ ਆਵਾਜ਼ ਹੈ ਉਹਦੇ ਨਾਲ ਜੁੜਦੇ ਉਹਨੂੰ ਵੀ ਵਰਦੇ ਜੁਰੇ ਹੋਰ ਕਰਦੇ ਬੇਬਾਣੀ ਬਾਣੀ ਜਿਹੜੀ ਹੈ ਨਾ ਪੋਜ਼ਿਟਿਵ ਦੀ ਹੈ ਬਾਣੀ ਉੱ디오 ਕਰਦੇ ਨੇ ਅੰਤਰਾਤਮਾ ਦੀ ਆਵਾਜ਼ ਤੂੰ ਇਗਨੋਰ ਕਰਦੇ ਰਹਿੰਦੇ। ਇਹ ਤਾਂ ਵਾਕਿਆ ਇਹਦੇ ਨਾਲ ਡੀਕਨੈਕਟ ਰਹਿੰਦੇ ਜਿਹਨੂੰ ਮੰਨਦਾ ਨਹੀਂ ਆਪਨੇ ਅੰਤਰਾਤਮਾ ਦੀ ਆਵਾਜ਼ ਨੂੰ ਹੀ ਨਹੀਂ ਮੰਨਦਾ। ਉਹਦੇ ਨਾਲ ਜੰਗਤ ਨਹੀਂ ਰਹਿੰਦੇ। ਸਭ ਛੱਡ ਕੇ ਚੱਲਦੇ ਤੂੰ ਅੰਤਰਾਤਮਾ ਦੀ ਆਵਾਜ਼ ਨੂੰ ਛੱਡ ਕੇ ਸੰਸਾਰ ਚ ਵਿੱਚ ਜਿਹਨੇ ਅੰਤਰਾ ਤੋਂ ਨਹੀਂ ਵਾਸ਼ਟੇ ਤਾਂ ਖਰੂ ਹੋਣਾ। ਕੁਝ ਤਾਂ ਕਰਦੇ ਨੇ। ਐਤੋ ਸ਼ੈਤਾਨ ਦਲੀਲਾਂ ਦੇ ਤੇ ਨਹੀਂ ਘੜਦਾ। ਮੰਤਰ ਮਸਾਉ। ਵੇਮਾਰਗ ਦੇ। ਮਾਰਗ ਆ। ਮੁਸੇ ਮੰਤਰ ਮਸਾਉ। ਮੁਸੇ ਠੱਗੇ ਹੋਇ ਨੇ, ਠੱਗੇ ਆਉਂਦੇ। ਉਹ ਤਾਂ ਲੋਕਾਂ ਨੂੰ ਠੱਗਦੇ ਨੇ, ਚਲਾਕ ਬਣਦੇ। ਬੁੱਤਰ ਬਸਾਣ ਕੀ ਬੁੱਤਰ ਆਣਾ ਦਾ ਬਸਾਣ ਕੀ ਹੁੰਦਾ ਆ ਸਰੀਰ ਹੈ ਬਸਾਣ ਸਿਰਫ ਉਹਨਾਂ ਕੋ ਕੀਮਤ ਤੇ ਰੋਟੀਆਂ ਦਾ ਮੰਤਰ ਹੈ ਛੇ ਦਿਨ ਰੋਡਾਂ ਦਾ ਮੰਤਰ ਹੋਰ ਕੁਝ ਨਹੀਂ ਇਹ ਰੋਟੀ ਕਿਵੇਂ ਖੋੜੀਏ ਪੈਸਾ ਕਿਵੇਂ ਕਮਾਉਣ ਸੰਸਾਰੀ ਜੀਵਨ ਸੁੱਖ ਕਿਵੇਂ ਪ੍ਰਾਪਤ ਕਰੀਏ ਇਵਰਤਨ ਬਸਰਾ ਅਗੇ ਸਰੀਰ ਮਸਾਣ ਹੈ ਇਹ ਸਰੀਰ ਨੂੰ ਮਸਾਣ ਕਹਿੰਦੇ ਨੇ ਇਹਨੂੰ ਪ੍ਰੈਸਪਿੱਧਰ ਵੀ ਕਹਿੰਦੇ ਨੇ ਮਸਾਣ ਵੀ ਕਹਿੰਦੇ ਨੇ ਸਰੀਰ ਜਾਲੇ ਹੋਏ ਨੂੰ ਮਸਾਣ ਕਹਿੰਦੇ ਨੇ ਨਾ ਜੇ ਚੜ ਜਾਂਦਾ ਵੀ ਇਹ ਦੇਹ ਤਾਂ ਕਿਸੇ ਮਸਾਣ ਖੜਾਤਾ ਮਸਾਣ ਜਾਂਦਾ ਵੀ ਸਰੀਰ ਮਸਾਢੇ ਜਾਲਦੋਫੇ ਵੀ ਮਸਾਢੇ ਉਹ ਵਾਲ ਸਰੀਰ ਦੇ ਲੋੜਾਂ ਖਤਰੇ ਸਾਰਾ ਬੁੱਤਰਾ ਉਹਨਾਂ ਕੋਲ ਜੋ ਉਹਨਾਂ ਦਾ ਉਪਦੇਸ਼ ਹੈ ਸਾਰੇ ਬਾਹਲੇ ਸਰੀਰ ਨਾਲ ਜੋੜਦੇ ਨੇ ਮਾਇਆ ਧਾਰੀ ਦੇ ਦੇਵ ਦੇਵਤਿਆਂ ਨਾਲ ਜੋੜਨਗੇ ਸਰੀਰ ਨਾਲ ਜੋੜਨਗੇ ਆਪਣੇ ਨਾਲ ਜੋੜਨਗੇ ਸਰੀਰ ਨਾਲ ਜੋੜਨਗੇ ਆਪ ਗੁਰੂ ਬਣਨਗੇ ਸਰੀਰ ਨਾਲ ਬਣਨਗੇ ਇਹਨੂੰ ਮੰਤਰ ਮਿਹਾਣ ਜੈਨਾ ਉਸ ਦਾ ਲਵੈ ਕੁਮਾਰੀ ਸ਼ਬਦ ਤਾਂ खोजਦੇ ਨੀ ਸ਼ਬਦ ਨਹੀਂ ਜਿੰਦੇ ਵਰਾਹੀ ਤਗਰੀ ਜਾਂਦੇ ਪੁੱਠੀ ਬਾਣੀ ਲੈ ਲਈ ਪੁੱਠੀ ਲਵੇ ਕੁਬਾਨ ਕੁਬਾਨ ਹੁੰਦੀ ਹੈ ਪੁੱਠੀ ਪੁੱਠੇ ਅਰਥ ਲੈ ਲੈ ਬਾਣੀ ਦੇ ਬਾਣੀ ਦੇ ਪੁੱਠੇ ਅਰਥ ਕਰ ਲੈ ਬਾਣੀ ਨੂੰ ਕੁਬਾਨ ਲੈ ਰਿਹਾ ਪਾਕਤਾਨੀ ਬਾਣੀ ਨੇ ਵੀ ਉਲਟੇ ਅਰਥ ਕਰਦੇ ਸਤ ਜੀ ਜੋ दुखी 2000 की प्यारी ਨੂੰ 700 ਦੀ ਗੱਲ ਕਰ ਲੈਣਗੇ ਸੁਧਾਰੀ ਗੱਲਾਂ ਜੋੜ ਦੇਣਗੇ ਲੈ ਕੇ ਇਹ ਤਾਂ ਫਿਰ ਜਿਹੜੀ ਸੀ ਫਿਰ ਜਸ ਤਬੇ ਬਰਪਕੇ ਆਰਖ ਬਰੇ। ਵੀਰ ਤਾਂ ਕਹਦਾ ਲੋਕਾਂ ਹੈ ਕੀਤੇ ਹੈ ਤਾਂ ਬ੍ਰਹਮਚਾਰ। ਬ੍ਰਹਮਚਾਰ ਨੂੰ ਬਾਲੀ ਲਈ। ਬਾਲੀ ਨਾਨਕ ਸਾਚਰਤੇ ਸੁਖ ਜਾਣ। ਗੁਰੂ ਕਹਿੰਦੇ ਨੇ ਬਾਦ ਦੇ ਵਿੱਚ ਜਿਹੜੇ ਸੱਚ ਦਾ ਚੜ ਜਵੇ। ਤਾਂ ਇਹ ਸੁਭਜ ਲੋਕ ਉਹਨਾਂ ਨੇ ਜਾਣਿਆ ਸੋ ਕੀ ਅੰਦਰ ਜਿਹਨਾਂ ਨੂੰ ਸੱਚ ਦਾ ਰੰਗ ਚੜ੍ਹਿਆ ਜਿਹੜਾ ਉਹ ਸੁਖਬੰਦੀ ਬੈਠੇ ਨੇ ਨਾ ਕਵਾਲ ਨਾਲੇ ਸਰੀਰ ਕੋ ਸੁਖ ਹੈ ਦੀਗਾ ਉਹ ਸੁਖ ਨਹੀਂ ਅੰਦਰੋਂ ਦੁਖੀ ਨੇ ਹੋ ਬਦਰੋਂ ਭੈ ਵੀ ਇਦਣੇ ਹੋ ਜਿਨ੍ਹਾਂ ਨੂੰ ਸੱਚ ਦਾ ਰੰਗ ਚੜ੍ਹ ਗਿਆ ਅਸਲ ਦੇ ਵਿੱਚ ਸੁਖ ਤਾਂ ਉਹਨਾਂ ਨੇ ਜਾਣਿਆ ਸੁਖ ਕੀ ਹੈ ਜਿੱਦਾਂ ਜਰ ਪੈ ਹੈ ਜਿਵੇਂ ਕਿ ਕਾਣਾ ਮੈ ਜੋ ਸੁੱਕ ਮੇ ਹੋ ਜੂ ਪੈ ਵਿੱਚ ਸੁਖ ਸੁਖ ਨਹੀਂ ਰਹਿੰਦਾ ਇੰਦਾ ਕਿਸੇ ਦਾ ਕੰਮ ਚੰਗਾ ਹੋਵੇ ਘਰ ਵਧੀਆ ਹੋਵੇ ਸਾਰੇ ਸੁੱਖ ਸਾਧ ਰੋਲ ਪੈਸੇ ਦੀ ਕਮੀ ਨਾ ਹੋਵੇ ਪਰ ਉਧਰੋਂ ਬਗਬਰੀ ਹੁੰਦੀ ਹੋਵੇ ਜੋ ਬੜਿਆ ਨੂੰ ਘਟ ਫੇਟਾ ਨਾ ਉਹ ਜਿਆਦਾ ਲੱਗਦਾ ਤੇ ਕਰੋ ਵੀ ਜਿਆਦਾ ਇਹ ਕਰਕੇ ਜਿੱਡਾ ਬੜਾ ਸੰਤ ਹੁੰਦਾ ਉਹਨੂੰ ਬਹੁਤ ਜ਼ਿਆਦਾ ਰੋੜੇ ਜਿਆਦਾ ਹੁੰਦੇ ਸ੍ਰੀ ਉਰੂ ਘਟ ਹੁੰਦਾ ਸ੍ਰੀ ਉਰੂ ਵੀ ਹੁੰਦਾ ਤਾਂ ਖਹਿੜਾ ਛੜਾਉਂਦਾ ਉਹਦਾ ਕਈ ਵਾਰ ਆਇਆ ਕਹਿੰਦਾ ਤੂੰ ਛੇਤੀ ਕਰ ਬਾ ਇਹ ਤੋਂ ਭਰੇ ਉਹ ਜਦੋਂ ਪਹਿਲਾਂ ਦੁਖੀ ਹੁੰਦਾ ਉਹਦਾ ਦੁਖੇਦਾਰੂ ਵੱਧ ਜਾਂਦਾ ਹੈ ਬਹੁਤ ਰੂ ਕਰੇ ਲਾਉਂਦਾ। ਸੋਹ ਤੋਂ ਪਹਿਲੀ ਬੰਦੋ ਉਹ ਪਹਿ ਜਿਆਦਾ ਬੁੱਧਾ ਸੁਖ ਹੈ ਨਾ ਸੁਖ ਰੋਗ ਬਣ ਕੇ ਬਹੁਤ ਜ਼ਿਆਦਾ ਪੈ ਹੁੰਦੀ ਹੈ। ਸੱਚ ਦੇ ਰੰਗਿ ਚੜੇ ਬਿਨਾਂ ਸੁਖ ਦਾ ਸੰਸਾਰ ਰੂਪ ਤਾਂ ਹੀ ਦੀ ਸੁਖ ਦਾ ਕੀ। ਜਿਹੜਾ ਸੁਖ ਅਸੀਂ ਬੰਦਦੇ ਆ ਨਾ ਜਾ ਕੇ ਧਰਮ ਚੋ ਗੁਰਦਵਾਰਿਆਂ ਚੋ ਅਸਾਂ ਚੋ ਰੋਗੇ ਉਹਨਾਂ ਜਿਹਨ ਰੋਗੇ ਉਹ ਤੂੰ ਸਭ ਬੰਦਾ ਹੈ ਜਿਹਦਾ ਜਨ ਗੁਰਬਾਨੀ ਦੀ ਸੋਝੀ है ਜਿੱਦਾਂ ਜਿਹੜ ਗੁਰਬਾਨੀ ਦੀ ਸੋਝੀ ਹੈ ਦੀਦ ਨਾਮ ਦਾ ਰੰਗ ਰਗਣ ਜਦ ਹੀ ਗੁਰਬਾਨੀ है ਰੰਗ ਤੇ ਰਗੇ ਨਹੀਂ ਗਏ ਜਿੱਦਾਂ ਇਹ ਹੀ ਬੱਧ ਗਾ ਸੁਭਗਾਂ ਦੇ ਇਹੀ ਬੱਧਾਂ ਦੇ ਔਰ ਅਸਲ ਦੇ ਵਿੱਚ ਰੋਗ ਵੀ ਹੁੰਦੇ ਚਲੇ ਜਾਉਂਗੇ ਰੋਗ ਵੱਧਾ ਚਲੇ ਜਾਊਗਾ ਰੋਗ ਹੀ ਹੁੰਦੇ ਚਲੇ ਜਾਊਗਾ ਲੋਬ ਉਹ ਅਕਾਰ ਵੱਧੇ ਚਲੇ ਜਾਊਗਾ ਨਾਲ ਸਾਚ ਰਤੇ ਸੁਖ ਜਾ ਸੱਚ ਜਾਰਾ ਗਿਆ ਫਿਰ ਇਹ ਚੀਜ਼ਾਂ ਵੀ ਮੁੱਕਦੇ ਸੁੱਤ ਸਾਰੇ ਫਿਰ ਪਰਮ ਸੁਖ ਮੁੱਕਣ ਫਿਰ ਰੋਗ ਦਾ ਆਤਮਾ ਦੇ ਲੈਵਲ ਦਾ ਸੁੱਖ ਉੱਢਣ। ਦਿਰ ਭੈ ਪਦ ਬੁੱਧਣ। ਸੁੱਖ ਵਿੱਚ ਰਹਿੰਦੇ ਜੋ, ਉਹੋ ਜਿਹੜੇ ਰਹੇ ਤੇ ਸੁੱਖ ਹੈ। ਬਾਣਾ ਬਨਣਗੇ, ਬਾੜੇ ਬੁੱਧਣ ਤੇ ਸੁੱਖ ਹੈ। ਜਿਹੜੇ ਬਾੜਾ ਦੀ ਬੰਦ ਦਾ, ਉਹਦੇ ਚੋਂ ਸੁੱਖ ਹੋਈ ਦੀ ਸੁੱਖ।